आओ भक्ति विदाज सखी आओ भक्ति विदाज सखी आओ भक्ति विदाज सखी गुरु रब्बा सतगुरु रब्बा गोविंद श्री हरि गोपाल के जयकारे आओ भक्ति विदाज सखी आओ भक्ति विदाज सखी ਆਦੀ ਸਾਚੀ ਨਾਮ ਨੂੰ ਉੱਚੀ ਕਰੇ ਉਤਾਰੀ ਮੁੱਲਾ ਬੱਲਾ ਜਗਤ ਦਾ ਗੋਸਰੀ ਮੇਰ ਕਰਾਉ ਤੇ ਜੇ ਆਪੇ ਅਮਾਣੇ ਜੀ ਦੇ ਅੰਦਰ ਜੀਵਨ ਸਾਰਾ ਜਦੋਂ ਆਪੇ ਬਰਤੀ ਨਿਬਾਹ ਚਾਹੇ आज की शक्ति आज को शक्ति शक्ति को नमस्कार सत्य को नमस्कार गुरु जी के चरणों में प्रणाम आज की शक्ति आज को शक्ति शक्ति को नमस्कार जय श्री राधे कृष्ण ਰਬ ਦੀ ਸੇਵਾ ਖਲਕਾ ਰਬ ਦੀ ਦੀ ਜਪੂ ਸੱਜੀ ਦੀ ਸੱਜੀ ਵਾਜੀ ਜਿੰਨ ਖਲਕਾ ਸਾਧੂ ਦੀ ਜੀ ਜੀ ਮਾਇਆ ਅੰਤਿਆਨ ਜਗਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਕਾਲੇ ਰੰਗ ਵਿੱਚ ਕੋਈ ਸਰਕਾਰ ਜੀ ਨਾ ਹੋਣੀ ਕੋਨੇ ਦੇ ਕੋਤੇ ਜਲਮਤ ਆਰਾਧੀ ਕਰਕੇ ਸੂਰਜ ਜੀ ਜੀ ਕਹਾਣੀਆਂ ਨਹੀਂ ਹੈ ਉਹ ਬੰਸ਼ੇ ਇਸ ਪ੍ਰਕਾਰ ਹੁੰਦੇ ਨੇ ਬਸਾਂ ਦੇ ਕੋ ਵਾਹਕੀ ਅੰਤਿਆਮੇ ਤਤ ਪਾਵਨ ਸੰਦੇਸ਼ ਜਿਨਾਂ ਦੇ ਗਾਨ ਕੋ ਦਾਰ ਸਿਖੇ ਹੋਏ ਜਿਸ ਸੰਸਾਰ ਕਲਿਆਣ ਵਾਸਤੇ ਸਰਗੁਣਾਇਕ ਦੇਮਾਰ ਸਾਹਿਬ ਦਾ ਸਾਧ ਨਿਵਾਣ ਕਲਾਤਾਰ ਉਦਾਰਚਾਰੀ ਦੀ ਤੋਸਤੀ ਇਸ ਸੰਗਤ ਦੇ ਗੌਰ ਕਰਦੇ ਹਾਂ ਕਿ ਕੀ ਸਰਬੀ ਨਾਨਕ ਦੇਵ ਜੀ ਦਾ ਆਦਾਰ ਹੈ। ਐਸੇ ਕੋਈ ਸਾਧ ਸੰਗਤ ਦੀ ਗੁਰੂ ਮਾਰਾ ਸਾਲ ਹਾਂ ਆਦਾਰ ਹੁੰਦਾ ਹੈ। ਆਦਾਰ ਚਾਰ ਪ੍ਰਕਾਰ ਦੇ ਹੁੰਦੇ ਨੇ ਕਿਹੜਾ ਆਦਾਰ ਹੁੰਦਾ ਹੈ? ਵਿਦਕਲਾ ਆਦਾਰ ਹੁੰਦਾ ਹੈ, ਵਿਦ ਅਵਿਸ਼ਾ ਹੁੰਦਾ ਹੈ, ਪੂਰਨ ਆਦਾਰ ਹੁੰਦਾ ਉਹਨਾਂ ਤੇ ਕੌਣ ਆਦਾਰ ਹੁੰਦਾ ਗੁਰੂ ਮਾਰਾ ਸਾਹਿਬ? ਉਹ ਜੋ ਕੋ ਸਾਧ ਸੰਗਤ ਦੀ ਅਨਸਾਰ ਪਾਪਾ ਰਾਜੀ ਜੀ ਵਾਲੇ ਅਨਸਾਰ ਇਹ ਜਨਮਾਂ ਦੀ ਗੱਲ ਜੀਆ ਇਹ ਰਾਜੇ ਰਾਜ ਨੂੰ ਮੰਨਦੇ ਜਦ ਤੱਕ ਜੀਆ ਉਹ ਪ੍ਰਕਾਰ ਦੇ ਦੇਸ਼ ਨੂੰ ਤਕੂਮਦਾਰ ਯਾਹੂ ਇਸ ਨੂੰ ਤੋ ਮੰਨ ਰਾਜਾ ਆਦਿਕ ਹੋ ਜਾਂ ਇਸ ਤੋਂ ਪਹਿਲਾਂ ਆਦਿਕ ਹੋਏ ਨੇ ਸੈਲੇ ਪ੍ਰਾਣੀ ਉਸ ਪ੍ਰਕਾਰ ਜਿਹਨਾਂ ਦਾ ਹਕੂਮਤ ਕਰਦੇ ਉਹ ਦੁਨੀਆ ਹੈ ਉਹ ਸਾਰੀ ਕ੍ਰੀਮ ਦੇ ਨਾਲ ਗੁਣ ਹੋ ਜਾਵੇ ਇਹ ਪ੍ਰਕਾਰ ਦੇ ਅਜਿਹੇ ਤਾਰੀਖੇ ਦੀਆਂ ਕਹਾਣੀਆਂ ਆ ਕੋੜਾ ਲਈ ਤਾਂ ਦੇ ਰਹੇ ਹੁਣ ਜੇ ਅਸਲ ਕਾਰ ਨਹੀਂ ਦੂਸਰਾ ਅਵੇਸ਼ਯਾਰ ਦਾਰ ਹੁੰਦਾ ਜੇ ਪਹਿਲਾਂ ਕੋਈ ਤਾਜਤ ਨਾ ਹੋਵੇ ਹੋਰ ਕਮਾਈ ਕਰਕੇ ਜਿਸ ਵੀ ਤਾਜਤ ਕਮਾਵੇ ਉਹ ਵੀ ਅਵੇਸ਼ਯਾਰ ਦਾਰ ਕਹੀ ਜਾ ਹੈ ਇਸ ਪ੍ਰਕਾਰ ਵਿਸ਼ਮੀ ਦਾ ਅਕਾਰ ਹੈ ਪਰ ਸ਼੍ਰੀ ਰਾਮ ਮੰਨਿਆ ਗਿਆ ਹੈ ਉਸ ਹੀ ਜਦੋਂ ਕੱਦ ਕੀਤਾ ਉਸੇ ਕੱਦ ਕਰਨੇ ਕਰਕੇ ਕੋਈ ਨਹੀਂ ਜੀਹ ਦੀ ਸ਼ਕਤੀ ਅਵਸਰ ਹੋਏ ਉਹ ਪ੍ਰਵੇਸ਼ ਜਾਣੇ ਕਰਕੇ ਜਿਸ ਦੀ ਸ਼ਕਤੀ ਇਸ ਤਰ੍ਹਾਂ ਇਹ ਅਵੇਸ਼ਾ ਉਦਾਰ ਕਰਕੇ ਜਿੰਨੇ ਸਭ ਕਰਨੀ ਕਰਕੇ ਜਿਸ ਨੂੰ ਪ੍ਰਾਪਤ ਹੋ ਗਈ ਸਭ ਕੁਝ ਪ੍ਰਾਪਤ ਹੋਈ ਇਸ ਪ੍ਰਕਾਰ ਅਵੇਸ਼ਾ ਉਦਾਰ ਕਰਕੇ ਜਿਸ ਨੇ ਕਿਸੇ ਅਣਛੇ ਨੂੰ ਸਖਰ ਕਰਕੇ ਦਿੱਤਾ ਸੀ ਉਹ ਪਰਸਰਾ ਅਵੇਸ਼ਾ ਉਦਾਰ ਹੋਏ ਜੀ ਆਲਾ ਉਦਾਰ ਹੁੰਦਾ ਹੈ ਕਲਾਕਾਰ ਨੂੰ ਕਹਿੰਦੇ ਜੀ ਜੇ ਕੋ ਸਦਕੀਆਂ ਹੋਣ ਸਦਕੀਆਂ ਨਹੀਂ ਹੋਣੇ ਨਾ ਦੇ ਵਿਚਾਰ ਜੋ ਕਲਾ ਇਹ ਤਾਰ ਮਛੇ ਤਾਰ ਦੀ ਦੋ ਕਲਾ ਸੁਣੀ ਦੇ ਸਕਦੀਆਂ ਸੀ ਉਸੇ ਪ੍ਰਕਾਰ ਕਛੜ ਨਾਲ ਵਿੱਚ ਦੋ ਸਕਦੀਆਂ ਹਨ ਕੋਈ ਜੀਵ ਨਹੀਂ ਮਛੇ ਤਾਰ ਦਾ ਹੰਕ ਵੀ ਸੰਖਰ ਸਰੇ ਮਾਰੇ ਜੇ ਦੇ ਅਰਾਈ ਇਹ ਜਾਨਦਾ ਹੈ ਕਿ ਉਸ ਦਾ ਸੰਖਰ ਜੀ ਰਚਨ ਕਰ ਚਲ ਨਹੀਂ ਪ੍ਰਕਾਰ ਕਲਾਕਾਰ ਬਣ ਨੂੰ ਸਮੁੰਦਰ ਰਿਖਿਆ ਹੈ ਉਸ ਦੇ ਧਾਰ ਤੋਂ ਇਸ ਪ੍ਰਕਾਰ ਇਹ ਜਿਹੜੇ ਖਲੋਤਾਂ ਦੀ ਦੁਕਾਨ ਆਪੇ ਆ ਕੇ ਬਿਠਾਇੀ ਤੇ ਫੋਟੇ ਚੁਕਾਉਂਦੇ ਸੀ ਔਰ ਇਹ ਕੰਗੂਏ ਆਖ ਨਹੀਂ ਉਹ ਜਿਹੜੇ ਹਨ ਇਹ ਕਲਾਕਾਰ ਹੁੰਦੇ ਕੋਈ ਜਨਸ਼ਾਹਕਾਰ ਪੂਰਨ ਉਤਾਰ ਹਨ ਗੁਰੂ ਸਾਹਿਬ ਇਹਨੇ ਕਲਾ ਵੰਦੂ ਹੱਥੇ ਕੋਈ ਸਤਿ ਤਾਲਾਂ ਵਾਲੀ ਕਰਨ ਤਾਂ ਤੈਨੂੰ ਕਹੇ ਤੈਨੂੰ ਕਿ ਗੁਰੂ ਸਾਹਿਬ ਇਹ ਪੂਰਨ ਉਤਾਰ ਹਨ ਪੂਰਨ ਉਤਾਰ ਵਿੱਚ ਰਾਮਚੰਦਰ ਜੀ ਜੈਨਾ ਕਰਾ ਵਾਲੇ ਮੰਨੂਗੇ ਹਨ ਜੀ ਨੇ ਪ੍ਰੇਤਾਂ ਨੂੰ ਜੰਗ ਕਰਕੇ ਦੇਖਿਆ ਨੂੰ ਰਾਉਂ ਦੀ ਚਾਹ ਤੇ ਸੁਬਾਹ ਤੇ ਸਿਤਾ ਨੂੰ ਰਹਾ ਕਰਕੇ ਜੰਮਾ ਤੋਹ ਪ੍ਰਕਾਰ ਦੇ ਗੁਰੂ ਨਾਨਕ ਸਾਹਿਬ ਕਰਮ ਨਹੀਂ ਜਿਆ ਤੁਸੀਂ ਤੇ ਆਈ ਜਾਕਰ ਤੋਂ ਇਹਨਾਂ ਕੋ 16 ਕਲਾ ਵਾਲੇ ਮੰਨੂਗੇ ਇਸ ਜੀ ਜਗਮੋਲੇ ਕਈ ਕਾਮਯਾਬ ਕਰਕੇ ਕਿ ਤੰਦਵਾਰੀ ਅੱਛਾ ਕੀਤੀ ਸੀ ਮਹਾਂ ਭਾਰਗੇ ਨੇ ਬੜੇ ਤਾਰੀਕੀ ਬੀਤੇ ਹਨ ਇਹਨਾਂ ਨੂੰ 16 ਕਲਾਕਾਰ ਨੇ ਪੂਰਨ ਕਾਰ ਹੋ ਕਿਸੇ ਪ੍ਰਕਾਰ ਨੀਰਤਾ ਹੈ ਜੀਵਨ ਮਾਰਾ ਸਾਹਿਬ ਕਿਸੇ ਪ੍ਰਕਾਰ ਦੀ ਨੀਰਤਾ ਨਹੀਂ ਹਿੰ ਜੀਵਨ ਆ ਸਕੇ ਤਾਂ ਪੂਰਨ ਹੋਣਗੇ ਜਿਵੇਂ ਆਮ ਤੰਦੇ ਦੀ ਨੂੰ ਮਾਤਾ ਕੁਸ਼ਲਿਆ ਦੇ ਬੇਲੀ ਦੀ ਪੂਜਾ ਕਰਨਾ ਆਪ ਕੋਈ ਨਹੀਂ ਸੀ ਉਹ ਹੋਏ ਬੇਲੀ ਤੋਂ ਪੂਜਾ ਕਰਨ ਲਈ ਨਹੀਂ RAMCHAND JI ਆਪਣੇ ਸਰੀਰ ਨੂੰ ਮਾਤਾ ਨੂੰ ਕੁਸ਼ਲਿਆ ਨੂੰ ਮੁਕਰਾਣਾ ਸੀ ਇਸ ਤਰ੍ਹਾਂ ਸ਼ਕਤੀ ਨਾਮ ਲਈ ਮਾਰੇ ਸਾਜਣ ਵਾਲ ਬਾਹਰ ਘਰਿਆ ਨਹੀਂ ਕਰਨੇ ਚਾਹੀਦੇ ਮਾਤਾ ਕਿਰਪਾ ਨੂੰ ਕਾਹਨ ਸੇ ਪਾਤਸ਼ਾਹੀ ਨੂੰ ਆਪਣੇ ਜੰਗਕਾਰ ਨੂੰ ਸਾਰੇ ਜੀਵ ਤੇ ਜਿੰਦਾ ਕੋਈ ਨਹੀਂ ਕਰਦੀ ਹੋਇਆ ਜੋਨੇ ਕੋਸ਼ਲਾ ਜਿਮਾ ਨੇ ਸਾਉਦੇ ਜੁਮਾ ਦੀ ਨਾਲਾ ਜਾਣ ਤੇ ਜੀਨ ਆਖੀ ਤੇ ਬੱਤ ਜਿੰਦੇ ਆ ਗਿਆ ਮਹਾਰਾਜ ਜੀ ਕਿ ਆਪ ਉਹ ਹਰਗਨਵਾਸੀ ਨੂੰ ਆਈ ਇਹ ਸਭੀ ਆਪ ਰੱਖਿਆ ਕਰਨ ਆਈ ਇਹ ਪ੍ਰਕਾਰ ਮਾਤਾ ਕਿਰਪਾ ਜੀ ਯਾਤਕ ਜਨ ਦੇ ਮੱਥੇ ਤੇ ਦੇ ਜੀਵ ਦੇ ਲੱਗੇ ਹੋ ਕੋ ਕੁਝ ਨਹੀਂ ਲੱਗੇ ਮਾਤਾ ਜੀ ਨੂੰ ਸਰਵਾ ਹੋ ਗਈ ਤੇ ਜੀਨ ਸਾਹਿਬ ਪ੍ਰਵੇਸ਼ ਦਾ ਇਨਕਾਰ ਹਨ ਰੋਹੀ ਨੂੰ ਸਿਖਾਉਣ ਆਪਣੀ ਚਲਾਉਣੀ ਸਿਖਾਉਣੇ ਆਸ ਸੀ ਮਾਤਾ ਦੇ ਤਮਹਾ ਤਾ ਕਰਕੇ ਜਿੱਤ ਗਈ ਆਦਮੀ ਜਿਤਨੇ ਸੁੱਖੇ ਲੱਖੇ ਮੋਜੇ ਨੇ ਆਉਂਦੇ ਉਹਨਾਂ ਕੋਈ ਮੰਗਿਆ ਮਾਤਾ ਨੂੰ ਮੋਹ ਪਛਾਰਾ ਇਹ ਗਿਆਨ ਉਹ ਮੋਹ ਵੀ ਕਿਨਾਰ ਮਾਤਾ ਦੀ ਸ਼ਾਂਤੀ ਸੀ ਉਹਨਾਂ ਦੇ ਕਾਰਨ ਤੋਂ ਮਾਤਾ ਨੂੰ ਆਪਣੀ ਜੀਵਨ ਦੀ ਦੇ ਤਾਈਂ ਇਸੇ ਪ੍ਰਕਾਰ ਦੀ ਜਿੰਦਗੀ ਅੱਡ ਕਰਕੇ ਤ੍ਰਿਪੂਰ ਨਹੀਂ ਨਿਕੁਪੌਰ ਵਾਣੇ ਦੀ ਸਿਖਾਤ ਲੱਗੀ ਸੀ ਦੇ ਖਾਸੀਆਂ ਦੀ ਕੋਸ਼ਿਸ਼ੀ ਸਾਰੇ ਜਿਸੇ ਖਾਤੂ ਦੀ ਨੂਰੇ ਲਿਖੇ ਕੋ ਸੰਕੂ ਜਿਨੂਨਾਂ ਦੀਆਂ ਇਹ ਮਾਤਾ ਸਾਹਿਬ ਦੀ ਸੰਕੂਤ ਕੋ ਸਭੇ ਮਹੰਦ ਦੇ ਵਿੱਚ ਲਿਖੀ ਆ। ਅਜੇ ਸੰਗਰਾਂ ਦੇ ਤੇ ਸਤਨ ਸ਼ਾਂਚਰਨੀ ਕੋ ਜਿਸ ਪ੍ਰਕਾਰ ਜਨ ਨਾਲ ਮੱਕਾ ਫਿਰ ਜਾਣਾ ਉਸੇ ਪ੍ਰਕਾਰ ਸਾਖ ਦੀਆਂ ਵਿੱਚ ਨੂੰ ਹੁਣ ਤਾਂ ਕੋ ਮਿੱਠੇ ਲੱਗਦੇ ਆਂ। ਦਾਈ ਜਰਖੇ ਉੱਪਰ ਕੋ ਹੋਰੋ ਤਾਂ ਲੱਗਦੇ ਆਂ। ਕੋਈ ਨਹੀਂ ਮਿੱਠੇ ਉਹ ਹੱਲ ਲਿਆ ਦੇਣੇ ਸੰਦੇ ਦੇ ਵਿਸ਼ੇ ਸਾਹਿਬ ਜੀ ਇਹ ਸਮਝਾਉਂਦੇ ਕਿ ਜੰਤ ਸੰਕਤੀਆਂ ਇਹ ਨਹੀਂ ਆ ਕਿ ਉਸੇ ਪੰਜਾ ਮਾਰਾ ਸੰਹ ਲਾ ਕੇ ਕੋਈ ਤਾਂ ਕੋਹਹਾਨ ਕੱਟ ਰਹੇ ਹਿੱਥ ਉੱਪਰ ਤੇ ਕਦਮ ਹੈ ਪਰ ਪੰਜਾ ਇਸੇ ਤਾਰਿਕ ਤੇ ਲਗਾ ਉਸੇ ਤੇ ہمارا ਉਹ ਹੱਥ ਚਲੇ ਪੰਜੇ ਲੱਗੇ ਹੋਏ ਹਨ ਇਹ ਸੰਦੇਆਂ ਦੀਆਂ ਵਿਸ਼ੇਸ਼ ਸਕਦੀਆਂ ਉਹ ਗੁਰੂ ਸਾਹਿਬ ਗੁਰੂ ਹਰਗੋਬਿੰਦ ਉਹਨਾਂ ਵਿਚਾਰਾਂ ਨੂੰ ਕਿਸੇ ਪ੍ਰਕਾਰ ਘਾਤੀ ਨਹੀਂ ਹਨ ਬਲਕਿ ਜਲਦੀਆਂ ਕਰਕੇ ਬੇਨਤੀ ਗੁਰੂ ਮਾਰਾ ਸਾਹਿਬ ਕੋ ਕਾਜ ਦੇਣ ਦੀ ਮੰਗਲ ਦੇ ਤੇ ਗਾਲੀ ਮਰਵਾਉਣੇ ਤੇ ਬਾਲੋ ਦੀ ਮਾਲ ਲਾ ਕੇ ਕਿਉਂ ਕਰੇ ਫਿਰਿਆ ਅਜੇ ਸਦੇ ਕਾਮਚਾਹੀ ਨਹੀਂ ਗਾਲੀ ਮਰਾਨੀਗੇ ਕਹਿੰਦੇ ਮੱਥੇ ਦੇ ਮਨਾਰੇ ਦਰਵਾਜ਼ੇ ਆ ਜਾ ਕੇ ਨਿਖਾਣ ਨਹੀਂ ਹੈ ਤੋਂ ਖੋਣੇ ਉਹ ਸੰਗਾਂ ਨਹੀਂ ਜੇ ਦੇ ਨਾ ਜਾਣੇ ਮੱਥਾ ਹੁਦਿਆ ਉਹ ਹੋਂਦਾ ਕੋਈ ਖਪੀਏ ਨਹੀਂ ਪਾਸੇ ਆ ਕੇ ਕਰਨ ਨਹੀਂ ਇਹ ਪ੍ਰਕਾਰ ਕਰਨੇ ਦੀ ਜੀਮਾ ਨੇ ਸਾਡੀ ਜੰਤ ਸ਼ਕਤੀ ਅਜਿਹਾ ਪ੍ਰਕਾਰ ਕਰਕੇ ਨਾ ਹੋਕਾਰਾ ਨਹੀਂ ਨੀਂ ਸ਼ਕਤੀ ਜੰਤ ਸ਼ਕਤੀ ਨੇ ਸਾਡੀ ਵਿਸ਼ੇਸ਼ ਸ਼ਕਤੀ ਹੈ ਜੰਤ ਸ਼ਕਤੀਆਂ ਦੇ مالک ਨੇ ਜੰਤ ਨੇ ਕਰਖਣਾ ਆ ਕੇ ਕੰਨ ਇੱਕ ਤਾਂ ਜੰਤ ਅਤੇ ਇੱਕ ਪ੍ਰਗਿਆ ਬੁੱਧੀ ਕੋਈ ਕਿਰਤਾ ਕੋ ਉਸੇ ਪ੍ਰਕਾਰ ਸਾਖ ਕਰੇਗੀ ਸੋ ਸਾਰੀਆਂ ਜੀਹ ਜੀਏ ਮਾਰੇ ਸਾਹਿਬ ਦੀ ਜੇ ਜੰਤੀ ਹੈ ਸਹੀ ਹੈ ਉਹਨਾਂ ਦੇਾਰੇ ਨੂੰ ਸ਼ਰੀਰ ਨੂੰ ਦੇਖ ਕਰਕੇ ਰਾਮਚੰਦ ਜੀ ਦੇ ਹਿਰਦੇ ਗਿਲਨੇ ਵਾਸਤੇ ਅਜਿਹਾ ਲੱਗਦਾ ਹੈ ਕਿ ਇਹ ਜੀਵਾਂ ਕੁਰੀਏ ਤੇ ਇਹੋ ਸਰੀਰ ਸਾਰੀਆਂ ਰਾਮਚੰਦਰ ਕੋਈ ਮੋਹਤ ਹੋਣੀਆਂ ਨਹੀਂ ਇਸ ਤੇ ਕਿ ਮੈਂ ਕ੍ਰਿਸ਼ਨ ਰੂਪ ਹੋ ਕੇ ਨਿਭਾਣਾ ਕੋਈ ਕ੍ਰਿਸ਼ਨ ਰੂਪ ਹੋ ਕੇ ਮੈਨੂੰ ਵਰਨਾ ਕੀਤਾ ਬਿਆਕਰ ਵਿੱਚ ਉਹ ਜੀਵਨਾਂ ਨੂੰ ਦੇਖ ਕੇ ਦੇਖ ਕਰਕੇ ਕੰਨ ਭਾਉਣਾ ਚਾਹਦਾ ਹੋਇਆ ਮੈਨੂੰ ਸ਼ਰਗੁਨ ਨਾਨਕ ਦੇਵ ਜੀ ਦੇ ਬਾਗੀ ਦੇ ਸੰਗਲਾ ਦੀ ਗੋਈ ਹੈ ਉਹ ਜਿਹੜੀਆਂ ਬੰਦੀਆਂ ਗੁਰੂ ਸਾਹਿਬ ਨੂੰ ਮੋਤ ਕਰਨੋਂ ਕਿਹਾ ਹੈ ਗੁਰੂ ਸਾਹਿਬ ਨੇ ਨਬੀ ਅੱਲੀ ਕਾਮਤਾ ਅਲਲ੍ਹਾ ਅੱਲੀ ਦੀ ਸ਼ਾਂਤੀ ਵਕਤੀ ਇਹ ਗੁਰੂ ਸਾਹਿਬ ਦੀ ਸ਼ਖਸੀਅਤ ਹੈ ਇਹ ਉਹਨਾਂ ਵਰਦਾਰਿਆਂ ਦੀ ਸਾਰੀ ਕੀਤੀ ਹੈ ਕੋਈ ਸੰਗਰਦਾਰ ਹੈ ਭੰਟਾਂ ਦੇ ਧਿਆਨ ਕਰਨਾ ਆਪੇ ਸੰਗਰਦਾ ਹੋਣਾ ਇਹ ਵੀ ਸੰਗਰਦਾਂ ਦੀ ਵਿਸ਼ੇਸ਼ਤਾ ਹੈ ਇਹ ਵਰਦਾਰੀ ਆਉਣ ਲੋਕ ਦਾ ਚੋਰ ਸੰਗਰਦ ਇਸ ਪ੍ਰਕਾਰ ਕਰੀਏ ਜਿੰਨੇ ਵਿਸ਼ਾ ਉਹ ਗੰਟੀ ਤੇ ਪੈਰਾਂ ਦੀ ਦੇਣਤੀ ਕਰਨੀ ਹਿਸਤ ਹੈ ਉਹਨਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਬਰਾਬਰ ਸਮਾਨੀ ਗੱਤ ਸਕਦੀ ਸਭੀ ਹਰਦਾ ਕਰਕੇ ਉਸੇ ਪ੍ਰਕਾਰ ਸੰਕਤੀ ਨੂੰ ਲਾਦੇ ਨੂੰ ਇਹ ਪ੍ਰਕਾਰ ਇਹ ਹਾਜ ਲਾਉਂਦੇ ਸਾਸੀ ਨਹੀਂ ਸੰਕਤੀ ਦੇਸੀ ਸਾਈ ਬਣ ਕੇ ਵਾਲਾ ਹੋਰ ਵਾਲਾ ਸਾਈ ਕਰ ਗਿਆ ਇਹ ਗੰਤ ਸੰਕਤੀ ਹਮ ਜਿੰਦਾ ਨਹੀਂ ਹੈ ਇਸ ਪ੍ਰਕਾਰ ਉਹ ਤੇ ਦਿੱਤੀ ਦਿੱਤੀ ਹਾਂ ਜਿੰਦ ਜਿੰਦ ਕਾਹ ਬਣਾ ਦੇ ਕੇ ਨਰਮ ਵਿਦਿਆ ਉਸ ਨੂੰ ਪਾਸੇ ਲਾ ਕੇ ਪਾਉਣਾ ਸੀ ਤੇ ਉਸ ਨੂੰ ਨੰਦਰਾਮ ਗਾਂ ਦੇ ਵਿਦਿਆਰਥੀ ਨੂੰ ਕਾਉਟ ਬਣਾ ਕੇ ਸੁਣਾਈ। ਦੇ ਪਾਸ ਲਖਾਇਆ। ਜਦੋਂ ਗੁਰੂ ਮਾਰੇ ਸਾਹਿਬ ਜੀ ਕਹਿੰਦੇ ਜਿੰਨੂ ਜੀ ਦਾ ਵੀ ਕੇ ਉਹ ਪਹਾੜੇ ਦੂਸਰੇ ਦਿਨ ਗੁਰੂ ਮਾਰੇ ਸਾਹਿਬੀ ਚੁੱਪ ਕਰਕੇ ਜਾਦੇ ਤੇ ਨਾਮ ਕਰਨ ਨੂੰ ਉਹਨਾਂ ਦੇ ਜੱਜ ਹੋਰ ਲੜਕਿਆਂ ਨੂੰ ਪੜਦੇ ਹੋਏ ਤੁਸੀਂ ਪੜਦੇ ਨਹੀਂ ਹੋ ਜੀਨ ਕਹੇ ਪੜਦੇ ਜੀ ਇਹ ਸੌਣੇ ਕਰਕੇ ਤਾਂ ਸਾਹੇ ਵਾਲੀ ਜੰਦੀ ਹੈ ਤੂੰ ਨਾਲੇ ਜੇ ਕਰਕੇ ਸਾਹੇ ਮਿਲ ਜਾਏ ਉਹ ਕੰਨਾ ਖਾਸ ਖਾਂ ਖੜੀ ਬੰਦਾ ਇਹਨਾਂ ਉਹ ਜਿਹੜਿਆ ਤੋਂ ਹੋਣ ਵਾਲੇ ਪਾਧਰੇ ਦੀ ਵਿਸ਼ਾ ਚਲਦੀ ਕਿਸਮੀ ਚਲਦੀ ਸੀ ਜਦੋਂ ਬਾਕੀ ਕਾਲੀ ਦੀਏ ਨੂੰ ਲਾ ਕੇ ਦੂਆ ਹੈ ਕਿ ਮਾਰੇ ਇਹਨਾਂ ਕਰੋ ਨਾ ਉਹਨਾਂ ਦੇ ਕਦੰਗੋ ਖਾਲਾ ਕਰਤਾ ਸਭ ਗਿਆਨ ਨੂੰ ਜੰਮੇ ਸਮੂਹ ਵਿਦਿਆਨ ਦੇ ਰਚਣ ਵਾਲੇ ਬ੍ਰਹਮਾ ਵਿਦਵਾਨ ਹੀ ਹਨ ਉਸ ਪ੍ਰਕਾਰ ਜਿਹੜੇ ਹਨੇਰੇ ਸਾਬ ਸੰਖਣੇ ਵਾਲੇ ਉਹਨਾਂ ਨੂੰ ਸਪੀਡਾਂਸ਼ ਨਹੀਂ ਬਰੰਗ ਜਾਂਦੇ ਦੇ ਕੇ ਨਿਹਾਲ ਕਰਕੇ ਬਾਦੇ ਦੀ ਸੰਖੇ ਦੀ ਗੁਰੂਕੀ ਉਸ ਪ੍ਰਕਾਰ ਸਾਬ ਸੰਖੇ ਦੀ ਗੁਰੂ ਮਹਾਰਾਜ ਜੀ ਜਿੱਦਿਆ ਦੀ ਜ਼ਿਕਰ ਹੈ ਉਹਨਾਂ ਨੇ ਵਿਦਿਆ ਜਲਾਈ ਕਰਾਇਆ ਕਿ ਕਹੀ ਗੁਰੂ ਮਹਾਰਾਜ ਸਾਹਿਬ ਜਿਨਾ ਪੜਾਇਆ ਕਿ ਆਪ ਹੀ ਸਭ ਦੀ ਇੱਕ ਸਹੀ ਸਾਰਖਾਨੀ ਲਿਖਿਆ ਜੋ ਕੋ ਪ੍ਰਕਾਰ ਫਾਰਸੀ ਤੋਂ ਬੰਨ ਆ ਕੇ ਜਨਾਗ ਨੂੰ ਖਾਇਆ ਗਿਆ ਨੂਰੀ ਸੰਗੀਤ ਦੀ ਉਹ ਹੂ ਸੇ ਕੋ ਪਾਰਸ਼ਨ ਪਹਿਲੇ ਵੀ ਜਗਾਰ ਦੀ ਬੁਖਤੰਤੋ ਸੋ ਦਾ ਗੋਸ਼ਣ ਹੋ ਗਿਆ ਇਸ ਪ੍ਰਕਾਰ ਬੁਨ ਮਾਰੇ ਸਾਡੀ ਪ੍ਰਕਿਆ ਦੁੱਗੀ ਹੈ ਨਾ ਬੁੱਧੀ ਦਾ ਵੀ ਸੇ ਕੋ ਪਾਰਸ਼ਨ ਸਾਡੀ ਨਿਖਣ ਹੋਣਾ ਹੋਂ ਕਿਸੇ ਪ੍ਰਕਾਰ ਗੁਰੂ ਸਾਹਿਬ ਦੀ ਕੋਈ ਕੁਝ ਨਹੀਂ ਹੈ ਉਹਨੇ ਸਾਰੇ ਨੂੰ ਗੱਦੀ ਆ ਕਰਵਾ ਲਈ ਹੰਗੇ ਕਰਕੇ ਦੀ ਪ੍ਰਕਿਆ ਹੈ ਸੰਤਿ ਨੂੰ ਜਗਦੀ ਦੇ ਉਸ ਸੰਤਿ ਨੂੰ ਜਗਦੀ ਦੇ ਪ੍ਰਕਿਆ ਜੋ ਪ੍ਰਕਾਰ ਜਿੰਨਾਂ ਨੇ ਸਾਡੇ ਦੇ ਪਾਲਸਾ ਦਾ ਪ੍ਰਕਾਸ਼ ਬਣ ਕਰਤਬ ਕੋਣਾ ਹੈ ਕਰਤਬ ਸਾਹਿਬ ਚਾਹੇ ਦੀ ਰਾਮਚੰਦ ਜੀ ਜਿਹਾ ਹੋਰ ਕੀਤਾ ਬਣੋ ਸਾਲ ਕਰਕੇ ਉਹ ਫਿਰ ਰਾਜਨ ਕੋ ਰਾਜ ਕੋ ਨੂੰ ਮਾਨ ਕਰਕੇ ਦੇਵਤਾ ਨੂੰ ਕਹਿੰਦੇ ਸੁਭਾਅ ਦੇ ਆਏ ਜਿਹਾ ਰਾਮਚੰਦ ਜੀ 100 ਸਾਲ ਬਾਅਦ ਆ ਗਏ ਰਾਜ ਕਰਕੇ ਐਸਾ ਨਿਆਸੀਕਾ ਕਿ ਮਾਤਾ ਜੀ ਦੇ ਪੁੱਤਰ ਕੋਈ ਨਾ ਦੇਵੇ ਉਹ ਆਇਆ ਕਰ ਰਿਹਾ ਹੈ ਇੱਕ ਬ੍ਰਾਹਮਣ ਦਾ ਪੁੱਤਰ ਗੁਜਰਦੀ ਹੈ ਬ੍ਰਾਹਮਣ ਰਾਮਚੰਦਰ ਜੀ ਕੋਲ ਆ ਕੇ ਸਬਦ ਲਾਈ ਜੇ ਸਾਡੇ ਰਾਜੇ ਕੋਲੋਂ ਤੁਸੀਂ ਕੋਈ ਮਹਤਾ ਪੁੱਤਰ ਨਾ ਹੈ ਤੁਸੀਂ ਇਹ ਨਹੀਂ ਦਿੰਦਾ ਤੇ ਰਾਮਚੰਦਰ ਜੀ ਪਹਿਲੇ ਪੁੱਛਿਆ ਕਿ ਉਹ ਸ਼ੂਦਰ ਕਤ ਕਰਨ ਲੱਗੇ ਫਿਰ ਜੇ ਮੇਰਾ ਪੁੱਤਰ ਗੁਜਰਦੀ ਹੈ ਉਹ ਸੰਗੂਕ ਨਾਮੇ ਸ਼ੂਦਰ ਸ਼ੂਦਰ ਕੋ ਲੜਬੜਾ ਕਰ ਰਿਹਾ ਸੀ ਰਾਮਚੰਦਰ ਜੀ ਜਾ ਕੇ ਬ੍ਰਾਹਮਣ ਦਾ ਪੁੱਤਰ ਜਿੰਦਾ ਕਿਹਾ ਸ਼ੂਦਰਵਾ ਜਨਵਾਰ ਨਾਲ ਡਾਲਵਾ ਦੇ ਇਹ ਬਹਾਮੀ ਕੀਰਤਾਂ ਨੂੰ ਵੀ ਸਿਆਰ ਮੰਨਦੀ ਪ੍ਰਸੰਗ ਆਉਂਦਾ ਹੈ। ਉਸ ਪ੍ਰਕਾਰ ਦਾ ਰਾਜਨੀਤਿਕ ਵੀ ਆਂ ਕਰਿਆ ਕਰਦੇ ਸਨ। ਉਸ ਤਰ੍ਹਾਂ ਦੇ ਕਿਸੇ ਸਨ। ਉਸੇ ਪ੍ਰਕਾਰ ਉਹ ਹੈ ਕਿ ਕੱਬ ਪਰ ਸੰਗਲੂ ਨਾਂਕ ਉਹ ਜਿਹੜਾ ਮੋਦੀ ਖਾਨੇ ਦੀ ਕਾਰ ਲਾਈ ਸੁਲਤਾਨ ਹੋਏ। ਉਹ ਤੋਂ ਬਾਅਦ ਦੇ ਨੂੰ ਬਾਰਾ ਮਾਣ ਸਾਂਸਕ੍ਰਿਕ ਕਾਰਜਾਂ ਸਤਿਗੰਦੂ ਜੀ ਆਪੇ ਸਾਰੇ ਸ੍ਰੀ ਗੁਰੂ ਨੂੰ ਨਾਨਕ ਨੇ ਆਪੇ ਮਾਰੇ ਸਾਡੇ ਤੋਂ ਕੁਝ ਕਹੀ ਚ ਨਵਾਂ ਖੰਡਾਂ ਦੇ ਸੱਚੇ ਦੀਪਾਂ ਦੇ ਜਿਨ੍ਹਾਂ ਬਿਗਰੇ ਬਿਨਸਾ ਦਾ ਝੰਡਾ ਚੁਲਾਇਆ ਜੋ ਕੋਈ ਬਿਨਸਾ ਦੇ ਕੋਈ ਨਹੀਂ ਹੋ ਸਕਦਾ ਕੰਨਿਤਾ ਇਸਾਂ ਨੂੰ ਨਾ ਸਿਆ ਬੜੇ ਪਾਰੋਂ ਚਾਰ ਚੱਕੇ ਨਵਾਂ ਖੰਡਕ ਸ੍ਰੀ ਸੱਚਾ ਸੁਆ ਹੈ ਗੁਰੂ ਮਾਰੇ ਸਾਡੇ ਦਾ ਚੰਗਾ ਹੈ को सुख कामचानी से चार कलाएं हरनिया सब्जी को जल्दी को प्रक्रिया को जब चौथे प्रकार हासिल करनी दी प्रक्रिया सिद्धि तो पांचवे प्रज्ञी सिद्धि की की दिशा आनी जिन्होंने सामनेदा रामदंगी सीता ਕ੍ਰਿਸ਼ਨ ਕੋਹਾ ਨਾ ਨਾ ਕੋ ਰਿਸ਼ੀ ਕੋ ਪ੍ਰਾਪਤ ਹੋਆ ਕਿ ਜਗਮਾਨੀ ਕੋਈ ਨਿਸ਼ਾਨ ਦੀ ਚੀਜ਼ ਹੈ। ਆਜੀ ਉਹ ਕਰਕੇ ਨਿਸ਼ਕ ਪ੍ਰੇਰਣਿ ਸਿਧਿ ਸਹਿਤ ਗਿਆਨ। ਇਹ ਉਹ ਗਿਆਨ ਮੁਖ ਭਗਤੀ ਤੇ ਸੰਤਿਗਰਾਜ। ਆਪੇ ਸਿੱਖੀ ਦਾ ਜਿਹੜਾ ਦੁਨੀਆਂ ਦੇ ਵਿੱਚ ਪ੍ਰਵਾਹ ਲਾਇਆ ਕਿ ਸਲਾਵਾਹ ਕੋ ਨਾਮ ਦਾ ਪ੍ਰਵਾਹ ਚੱਲਦਾ ਨਹੀਂ। ਉਹ ਸੰਗਤ ਬਣਾ ਕੇ ਇਸ ਦੇ ਬਾਦ ਸਲਾਵਾਹ ਕਿ ਜੇ ਸਤਗੁਰ ਤੋਂ ਸੰਗਤ ਬਣਾਈ। ਜੇ ਸਤਗੁਰ ਤੋਂ ਸਹੀ ਗੁਰ ਜਿਹੜੀ ਬਸਤੀ ਕੀਤੀ ਹੈ सारी दुनिया ने बिछड़ी दुनिया में आज तो गुरु साहिब ने प्रयोगन किसी भी की है जिस प्रकार हमारा शास्त्र के साधक संकीर के जन्म के करके ऐसे प्रकार बुद्धि करके प्रज्ञा करके के आदि ये रामकन 10000 वरो भी अमर जो पैदा कीता कृष्ण जी ਇਹ ਨਹੀਂ ਕੋਈ ਵੀ ਅਮਰ ਦੇ ਇਸ ਤਰ੍ਹਾਂ ਨਹੀਂ ਸਮਝਦੇ। ਦੇ ਇਸ ਪ੍ਰਕਾਰ ਸੇ ਕਾਰਜਾ ਦੀ ਤੇ ਕੋਈ ਨਹੀਂ ਜੀ ਸਦੀ ਮੁਖੀਆਂ ਮੁਖਤਲਬੀ ਬੰਗਲਾਜੋ ਇਹ ਵਿਦੇ ਗਿਆਨ ਦੀ ਦਿੱਤੀ ਦੀ ਜੇ ਕਾਫਾ ਨੇ ਉਹ ਪਰਦੇਸੀ ਦੀ ਦਿੱਤੀ ਇਹ ਸਰਕਾਰ ਸਾਹਿਬ ਜੰਗੀ ਇਹ ਕਹਿੰਦੇ ਕਿਸੇ ਪ੍ਰਕਾਰ ਦੀ ਸੰਸਾ ਦੀ ਪੂਰਨ ਵਿਚਾਰਾ ਨਾਲ ਕੰਨੀ ਸੰਕਤੀ ਹੈ। ਕੋ ਮਹਾਰਾਜ ਸਿੰਘ ਮੰਗਵਾ ਕੋ ਬੰਗਲਾ ਹੰਸਾ ਦੀ ਬਾਰੇ ਹਣ ਕਰੀ ਨੀ ਹੋਇਆ ਨੂੰ ਕਲਾ ਦਾ ਹੱਜਣਵਾ ਪਰਵਰੋ ਨਹੀਂ ਭਾਰ ਆਰ ਗੋਗਜ ਮੰਗਲ ਕਹਿੰਦੇ ਹੋ ਇਹ ਕੇ ਸਰਬੀਰ ਸਭ ਦੀਪ ਦੀਪਾ ਹੈ ਜੋ ਸਿੱਖਿਆ ਸੰਗਠਨ ਦਾ ਜਨਮ ਮਨਾਏ ਅਸੀਂ ਮੰਨਦੇ ਹਾਂ ਕਿ ਗੁਰੂ ਸਾਹਿਬ ਅਵਤਾਰ ਪਰ ਆਜੋ ਜੇ ਤੁਮਾਰਾ ਅਵਤਾਰ ਜਿਹੜਿਆਂ ਨੇ ਜੀਵ ਸਾਹਿਬ ਜੀ ਇਹਨੂੰ ਪ੍ਰਮਾਨ ਕੀ ਹੈ ਪ੍ਰਮਾਨ ਦੋ ਤਰ੍ਹਾਂ ਦੇ ਨੇ ਕਿ ਲੋਗਿਕ ਵੈਦਿਕ ਪ੍ਰਮਾਨ ਵੈਦਿਕ ਪ੍ਰਮਾਨ ਕੋਈ ਨਾ ਮਹਾਰਾਜ ਹੋਣਾ ਹੈ ਸਮਾਰੇ ਸਾਹਿਬ ਜੀ ਦਾ ਸਤਕਾਰ ਦਾ ਯੋਗੀ ਗੁਰੂ ਸਾਹਿਬ ਦੇ ਬੇਅਤ ਸ਼ਕਤੀਆਂ ਦੀ ਗਾਥਾ ਜਿਹੜੇ ਉਹ ਗੁਰਾਂ ਦਾ ਵਾਚਿ ਸੁਣਾਉਂਦੇ ਜਿਵੇਂ ਸੁਣਾਉਂਦਾ ਹੈ ਕਿ ਗੁਰੂ ਨੰਨਾ ਗੁਰੂ ਸੁਨੋ ਗੁਰੂ ਦੇ ਨੀਂਦਰਾ ਗੁਰੂ ਸਾਚਾ ਦਾਰਬੰਦ ਗੁਰੂ ਨੰਨਾ ਇਹ ਗੁਰੂ ਮਾਲਾ ਸਾਹਿਬ ਜਨਕ ਪ੍ਰਮਾਨ ਦੇ ਆਰ ਗੁਰੂ ਸੁਨੋ ਸਾਰੇ ਸੰਸਾਰ ਦੇ ਸਭ ਤੋਂ ਵੱਡਾ ਸਰਗੋੜ ਮਾਲਕ ਇਹਨਾਂ ਕਹਿੰਦੇ ਆਖੀ ਮੇਰੀ ਕਿਉ ਗੁਰੂ ਦਾਰ ਸਰਬ ਕਹਨ ਇਹ ਵੈਦਿਕ ਪ੍ਰਮਾਨ ਦੇ ਆ ਅਸਲ ਇਹੋ ਸੂਪਰਕਾਰ ਲੋਕਿਕ ਪਰਮਾਨ ਜੋ ਜਦ ਬੁਖਾਰ ਤੋਂ ਦੇ ਬਚਨ ਉਹ ਦੇ ਘਰ ਵੀ ਗਿਆ ਸਾਡੀ ਸੱਚ ਬੋਲਦੇ ਹਨ ਉਹ ਕਹਿੰਦੇ ਹਨ ਕਿ ਇਹੋ ਸੂਪਰਕਾਰ ਸੁਣੀ ਪੁਕਾਰ ਜਤਾਰ ਕੋ ਬੁਰਨਾਮ ਜਗਮਾਹ ਪੁਖਾਇਆ ਉਹ ਸਦਗੁਣ ਨਾਮ ਕੋ ਸੱਚੀ ਕਾਂਜਾ ਕਲਦਾਰ ਨੂੰ ਬੁਨਾਨ ਪਾਇਆ ਇਹ ਲੋਕਿਕ ਪਰਮਾਨ ਹੈ ਅੱਜ ਜੀ ਆਇਆਂ ਨੂੰ ਜੋ ਜੀਨ ਕੀਨ ਪੂਰਨ ਜੀਨ ਆਪਣੇ ਇਤਾਰ ਦਾ ਸਹਰ ਪ੍ਰਮਾਨ ਦੱਸਿਆ ਜਿਹੜਾ ਜਿਹੜਾ ਘਰ ਜਲਾਨੀ ਧਰਤੀ ਹੁੰਦੇ ਹਨ ਉਹ ਜੰਨੀਆਂ ਦੀ ਨਿਯਤ ਪਾਰ ਨਹੀਂ ਆਦਿ ਧਰਮ ਕਰੇਗਾ ਪੂਰੇ ਨਾਵੇ ਸਤੰਦਰੋਂ ਦੂਸਰੇ ਨਾਹੀਂ ਸੰਕਰਿਆ ਉੱਤਾਲੀ ਮਤੀ ਹੋਈ ਜਾਂ ਜਿਹੜਾ ਹੁਣ ਕੋਈ ਜਿਤ ਹੰਮੇ ਕਰ ਦੇ ਫਰੇਈ ਹੋਈ ਇੱਕ ਤੀਨ ਪੁਕਾਰ ਕੀਤੀ ਕੋ ਸਾਡੇ ਦੁਨੀਆ ਚ ਧਰਮੀ ਰਖਾ ਕੋਨ ਆਸੀ ਦਾਰ ਹੋਇਆ ਹੈ ਇਹ ਸਭ ਕੇ ਨਿਦੀ ਪ੍ਰਮਾਣ ਹਨ ਗੁਰੂ ਜੀ ਪਾਰਦਾ ਦੇ ਆਉਣ ਦੇ ਗੁਰਬਾਣੀ ਅਨਸਾਰ ਵੀ ਭਾਈ ਗੁਰਦਾਸ ਸਾਹਿਬ ਦੇ ਅਨਸਾਰ ਵੀ ਅਤੇ ਵੇਦਾਂ ਦੀਆਂ ਸਤਰੀਆਂ ਅਨਸਾਰ ਵੀ ਕੋ ਗੂਮਾਰੇ ਹੋਵੇ ਜਿਹੜੇ ਪ੍ਰਮਾਣ ਦਾ ਹਾਂ ਤੇ ਪ੍ਰਮਾਣ ਦਾ ਅਵਤਾਰ ਸੱਚ ਹਨ ਉਹਨੇ ਜੀਤੀ ਜਿੰਨਾਂ ਨੇ ਇੱਥੇ ਕਿਹਾ ਕੋਈ ਦਾਰ ਦਾ ਆਇਆ ਹੈ ਤੀਜੇ ਦਰਸ਼ਨੋਂ ਇਸ ਦਰਸ਼ਨ ਦੀ ਗੱਲ ਨਹੀਂ ਦਾਨਾਰੀ ਉਹ ਚਾਰ ਯਾਤਰੀ ਉਹਦਾ ਫਰਦਾ ਹੋਇਆ ਉਸ ਨੂੰ ਦੇ ਅੰਦਰ ਹੋਇਆ ਉਸ ਨੂੰ ਦੇਖਾਂ ਦੇ ਅੰਦਰ ਜਗਾ ਦੇ ਕਹਦੇ ਨੇ ਦੇ ਜਿਹੜੀ ਜਗਾ ਦੇ ਜੇ ਅਸੀਂ ਸਾਰੀ ਗੱਲ ਕਰਦੇ ਸੀ ਲੋਕਾਂ ਨੂੰ ਜਾਣੇ ਨੂੰ ਸਭ ਨੂੰ ਹੱਥ ਮੋਟਨੇ ਬਦਲੀਏ ਦੁਖ ਹੋਈਆਂ ਦਾਨੀ ਸਭੀ ਦੁਖ ਹੋਈ ਧਰਮ ਆ ਕੋ ਦੇਵਤਾਂ ਅਨੁਸਾਰ ਉਹ ਬੰਨੋ ਚਾਹੀਏ ਅਰਹੰਤਗਰ ਬਾਰ ਕਰ ਤੰਗ ਦੇ ਬ੍ਰੋਹੀ ਬਿਕਾਰ ਵੀ ਕੋਈ ਹਨ ਕਿ ਤੇ ਆਪ ਜੀ ਨਾਮ ਸਾਹਿਬੀ ਦਾ ਕਿਸਮ ਹੈ ਤਾਂ ਆਪਨ ਦੱਸਿਆ ਜੇ ਯੰਗ ਯਾਰੀ ਤੋਂ ਹੋ ਜਿਸਨੂੰ ਸਾਰਾ ਤੱਕ ਘਰ ਕਹਿੰਦਾ ਹੈ ਜਦੋਂ ਕੋਈ ਚ ਕੋਈ ਬਦਰਤਾ ਹੋ ਜਾ ਹੈ ਉਹਨਾਂ ਨੂੰ ਮੇਕ ਨੂੰ ਆ ਕੇ ਉਹਨਾਂ ਦੇ ਪਾਸੇ ਰੱਖਿਆ ਨਹੀਂ ਹੋ ਸਕਦੀ ਮਿਲਕ ਦੀ ਉਹੇ ਰੱਖਿਆ ਕਰਨ ਆ ਕੇ ਪਰ ਉਹ ਤੋਂ ਆਪ ਆਗਿਆ ਨਹੀਂ ਕਰਦਾ ਬਦੀਆਂ ਦੇ ਸਨੇਤ ਹੋ ਕੇ ਜੇ ਮਾਰਾ ਦੇ ਹੁੰਦੇ ਹੈ ਉਹ ਕਲਾ ਵਾਲੇ ਹੁੰਦੇ ਹਨ ਕੋਲਾ ਕਲਾ ਨਹੀਂ ਦਸ਼ੀਂ ਦੀ ਹੋਣੀ ਹੈ ਮੁਰਮਾਨ ਕਲਾ ਹੋਇ ਸੋਹਣ ਕਲਾ ਹੋਇ ਗਾਇੂ ਕਾ ਬਸੋਮੀ ਕੋ ਸੋਹਣ ਕਲਾ ਸਬੂਰਨੀ ਖੜਿਆ ਅਨੰਤ ਕਲਾ ਹੋਇ ਖਾਜੂ ਖੜਿਆ ਜਦੋਂ ਸੋਹਣ ਕਲਾ ਵਾਲੇ ਰੂਹ ਵੀ ਸੀ ਅਬ ਹੁਣ ਕੋਣ ਕਲਾ ਨਾਲ ਸੰਨੀ ਕਦ ਦਾ ਤਕੂਲੇ ਹੋ ਬੜਾ ਧਿਆਨ ਕਿਸਮਾ ਸੀ ਕੋਸ਼ ਕਰਕੇ ਅਨੰਤ ਕਲਾ ਹੋਇ ਖਾਜੂ ਖੜਿਆ ਅਨੰਤ ਸੱਜਨੀਆ ਦੇ ਮਾਲਕੋ ਕੋ ਸਾਧਨ ਨਿੰਮਰ ਨੂੰ ਕੋਈ ਚੰਗਿਆਦੀ ਨਹੀਂ ਸਾਥੀ ਜੋ ਕਰ ਇਸ ਪ੍ਰਕਾਰ ਮਾਇਆ ਨਾਮ ਦੀ ਦੇ ਮਾਲਕ ਹੋ